ਅਸਤਿਤਵ ਮਿਥਿਆ ਨਹੀਂ ਰਸਨਾ ਪਰਸ ਉਹਦੀ ਜਿਹੜੀ ਰਸਾ ਉਹਦੀ ਜਿਹੜੀ ਗੁੱਧਾ ਮਿਥਿਆ ਦੇ ਨਾਲ ਛੋਟਣਾ ਸਪਰਸ਼ ਨਹੀਂ ਕਰਦੀ ਜਾਂ ਬੋਲਦਾ ਉਹ ਜੋ ਮਾਇਆ ਦੀ ਗੱਲ ਨਿਕਲਦੀ ਹੋਈ ਨਹੀਂ ਮਾਇਆ ਨੂੰ ਉਹਦੀ ਜਵਾਨ ਇਸ ਪਰਸ਼ ਨਹੀਂ ਕਰਦੀ ਮਾਇਆ ਦੀ ਬੜਾਈ ਜਦੋਂ ਨਿਕਲਦੀ ਹੋਈ ਨਹੀਂ ਮਾਇਆ ਨੂੰ ਅਲੱਗ ਕਰਕੇ ਜਾਂਦਾ ਹੈ ਹਾਂ ਜੀ ਮਨ ਵਿੱਚ ਪ੍ਰੀਤ ਰੰਜਨ ਦੇ ਦਰਸ਼ ਉਹਦੇ ਮਨ ਦੇ ਵਿੱਚ ਕੀ ਹੁੰਦੀ ਹੈ ਪ੍ਰੀਤ ਕੀ ਹੁੰਦੀ ਹੈ ਪ੍ਰੀਤ ਵੀ ਹੁੰਦੀ ਹੈ ਰੰਜਨ ਮਾਇਆ ਤੋਂ ਰਹਿਤ ਦਰਸ਼ਨ ਦੀ ਪ੍ਰੀਤ ਹੁੰਦੀ ਹੈ ਆਪ ਉਹ ਦਰਸ਼ਨ ਕਰਨਾ ਮਾਇਆ ਤੋਂ ਰਹਿਤ ਆ ਅਗਲੇ ਜਨਮ ਵੀ ਇਹੀ ਕਰਉਣਾ ਉਹਦੀ ਪ੍ਰੀਤ ਦੇ ਨਾਲ ਇਹ ਕਰਕੇ ਉਹਦੀ ਗੱਲਬਾਤ ਦੇ ਵਿੱਚ ਮਾਇਆ ਦੀ ਛੋਹ ਹੁੰਦੀ ਹੋਈ ਨਹੀਂ ਛੋਟਾ ਸਮਝਦੇ ਹੁੰਦੇ ਸੀ। ਇਹ ਨਰੋਜ ਜੋਤ ਦੀ ਗੱਲ ਕਰਦਾ। ਨਰੋਜ ਜੋਤ ਦੀ ਗੱਲ ਕਰਦਾ ਮਾਇਆ ਦਾ ਪ੍ਰਭਾਵ ਇਹ ਨਹੀਂ ਹੁੰਦਾ ਉਸ ਗੱਲ ਬਾਤ। ਜਿਹੜੇ ਜਿਹੜੇ ਜਿਹੜੇ ਮਾਇਆ ਵੀ ਨਹੀਂ ਪੈਂਦਾ ਉਹਦੇ ਵਿੱਚ। ਜਿੱਥੇ ਮਾਇਆ ਦਾ ਸਾਯਾ ਪੈ ਗਿਆ ਉੱਥੇ ਨਹਿਰ ਹੋ ਜਾਣਾ। ਜਿੱਥੇ ਮਾਇਆ ਦਾ ਸਾਯਾ ਪਾ ਗਿਆ ਉੱਥੇ ਨਹਿਰ ਦਾਗ ਪੈ ਜਾਣਾ। ਕਲੀਅਰ ਨਹੀਂ ਹੋਣੀ ਗੱਲ ਫਿਰ ਆਖਿਓ। ਹਾਂਜੀ। ਪਰਤ੍ਰਿਆ ਰੂਪ ਨਾ ਦੇਖੇ ਨਿਤਰ ਇੱਕ ਹੋਰ ਗੱਲ ਹੈ ਕਿਉਂਕਿ ਜਿਹੜੀ ਦੂਜੇ ਦੀ ਬੁੱਧੀ ਹੈ ਪਰਤ੍ਰਿਆ ਘਰ ਕੀ ਜਿਹੜੀ ਨਾਲ ਹੈ ਜਿਹੜੀ ਆਪਣੇ ਅੰਦਰ ਆਤਮਾ ਹੈ ਬ੍ਰਹਮਤੀ ਜਿਹੜੀ ਜਿਹੜੀ ਹੈ ਉਹ ਜਿਤ ਕਾ ਘਰ ਕੀ ਨਾਲ ਤਿਆਗ ਦੇ ਤਾ ਪਰਗਾਹ ਨਹੀਂ ਲੈਂਦਾ ਬਨਮਤ ਉਗਾਨਦੀ ਮਤ ਨਾਲੋਂ ਸੰਪਰਕੇ ਨਹੀਂ ਕਰਦਾ ਰੂਪੇ ਹੀ ਦੇਖਦਾ ਦੂਈ ਮਤ ਪੜਦਾ ਹੀ ਨਹੀਂ ਹੈ ਉਹਦਾ ਜਿਹੜੀ ਦੂਈ ਮਤ ਪੜੂਗਾ ਉਹਦਾ ਤਾਂ ਮਰ ਲਾ ਦੂਈ ਸਮਾ ਆਪਣਾ ਕੀ ਕਰਦੇ ਸਿਮਰਤ ਜਸਤਨ ਬੋਲਣਾ ਜੀ ਉਹਨਾਂ ਦੇ ਅੱਪਾ ਗੁਰਬਾਣੀ ਕਹਿੰਦੀ ਐ ਸਮਲ ਸਿਆਦਰ ਪੁਰਨ ਪਾਪ ਬਚਾ ਦੇ ਤੱਤ ਸਾਲ ਨਾ ਜਾਣੇ ਇਹਨਾਂ ਨੂੰ ਨਹੀਂ ਪਤਾ ਵੀ ਇਹ ਤੇ ਖੋਜਦੇ ਉਹ ਤਾਂ ਪਹਿਲਾਂ ਹੀ ਤਤ ਤੇ ਹੈ ਗੁਰਬਾਣੀ ਸਾਰਾ ਤਤ ਗਿਆਨ ਤੁਸੀਂ ਖੋਜ ਕਰਦਿਆਂ ਤਤ ਗਿਆਨ ਸਮਝਣਾ ਤਤ ਗਿਆਨ ਪੜਦੇ ਹੋ ਸਮਝਦੇ ਹੋ ਤੁਸੀਂ ਇਧਰ ਗਮੇਂਚੇ ਜਾਓਗੇ ਪਰ ਉਹ ਪ੍ਰਕਿਰਿਆ ਰੂਪ ਹੈ ਉਹਦੇ ਵਿੱਚ ਉਹਦੇ ਚ ਹੋਰ ਬੁੱਧੀ ਨਾ ਕੋਈ ਰੂਪ ਚਿਤ੍ਰਣ ਕੀਤੇ ਹੋਏ ਨੇ ਉਹ ਸਾਸ ਉਗਰਪਾਂਜੇ ਉਤੇ ਹੋਰ ਤਰ੍ਹਾਂ ਦਾ ਦਰਸ਼ਨ ਕਰਾਇਆ ਹੋਇਆ ਹੈ ਉਹ ਰੂਪ ਨਾ ਦੇਖੇ ਨੇ ਇਤਰ ਬਿਲਕੁਲ ਦੇਖਦਾ ਹੀ ਨਹੀਂ ਹੈ ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤਰੀ ਹਰ ਵਨ ਵਰਨ ਦੇਖੂ ਕੋਈ ਤੂੰ ਦੇਖਣਾ ਹੀ ਵਣਿਆ ਸਤੂ ਜਿਹੜੇ ਦੁਨੀਆ ਤੋਂ ਦਾ ਅੰਡ ਬੰਡ ਭਾਲਦੇ ਨੇ ਪਿੱਛੇ ਫਸ ਜਾਂਦੇ ਨੇ ਉਹ ਮਤਲਬੇ ਕੋਈ ਨਹੀਂ ਰਹਿ ਗਿਆ ਉਹਨੇ ਪਾਤਰੀਆ ਕਹਤਾ ਕਿ ਨਿਜ ਨਾਰੀ ਹੋ ਗਿਆ ਪਾਤਰੀਆ ਜੇ ਪਸਠੀਕ ਹੈ ਸਮਝਣਾ ਆਉਂਦਾ ਪਾਤਰੀਆ ਕਿ ਉਹ ਨਿਜ ਨਾਰੀ ਹੋ ਗਈ ਕਿ ਨਹੀਂ ਅੰਤਰ ਆਦਮੋ ਦੀ ਗੱਲ ਹੈ ਜਿਹੜੀ ਬੇਬੁੱਧੀ ਹੈ ਕਿਸੇ ਆਦਮ ਨਾਲ ਉਹ ਆਪਣੀ ਮਾਤੈ ਖਰਾ ਖੋਟ ਉਹਦੀ ਪਛਾਣ ਨਹੀਂ ਕਿ ਜੇ ਤੁਸੀਂ ਆਪਣੀ ਮਾਤੈ ਖਰੇ ਖੋਟ ਦੀ ਪਛਾਣ ਕਰੋਗੇ ਉਹਦੇ ਬਾਅਦ ਫਿਰ ਤੁਸੀਂ ਉਹ ਅਡਾਪਟ ਕਰੇ ਨਹੀਂ ਸਕਦੇ ਕੁਕਤ ਜਦੋਂ ਰਬਦਾਸ ਕਹਿ ਰਿਹਾ ਹੈ ਰਬਦਾਸ ਕਹਿ ਰਿਹਾ ਜੇ ਤੁਹਾਡੇ ਅੰਦਰ ਤਰਖਣੀ ਪੈਗਾ ਹੋਇਆ ਤਾਂ ਕਪੜੀ ਬੰਦੀ ਦਾ ਤਰਗਣਾ ਚ ਹੈ ਪਰਮੇਚ ਹੈ ਦੂਵੀ ਮਾਤਾ ਦਾ ਪਰਮ ਤੁਹਾਡੇ ਅੰਦਰ ਦਾ ਬੜੂਗਾ। ਪਤਰੀਆ ਦਾ ਪੈਦਾ ਕੀਤਾ ਹੋਇਆ ਦਰਮ ਸਾਰਾ ਤੁਹਾਡੇ ਅੰਦਰ ਆ ਬੜੂਗਾ। ਜੇ ਤੁਸੀਂ ਉਹਦੀ ਖਰਾ ਖੋੜ ਦੀ ਪਛਾਣ ਆਪਣੀ ਕਰੀ ਤਾਂ ਪਛਾਣ। ਪਰਖਾ ਗੁਰ ਕੀ ਬਾਤ ਖੜੀ ਇਹ ਗੱਲਾਂ ਦਾ ਸਾਬ ਦਾ ਜੀ ਉੱਤੇ ਹਾਂ ਆਪਣੀ ਉਡੇ ਕੋਲ ਕੱਲ ਹੈ ਤੇ ਅੱਖਾਂ ਵਿੱਚ ਜੇ ਵੀ ਕੋਈ ਗੱਲ ਮੰਨੀ ਜਾਏਗੀ ਕਿਸੇ ਦੀ ਹੋਵੇਗੀ ਪਰਖ ਕੇ ਮੰਨੋ ਗੁਰਬਾਨੇ ਨੂੰ ਪਰਖੋ ਨਾਲ ਦੀ ਨਾਲ ਜੇ ਜੇ ਪਰਖ ਦੇ ਨਹੀਂ ਤੁਸੀਂ ਮੰਨਦੇ ਬਣੀ ਬਿਨਾ ਪਰਖੇ ਦੇ ਕੋਈ ਚੀਜ਼ ਮੰਨੇ ਵੀ ਨਹੀਂ ਜਾ ਸਕਦੀ ਜਿਹੜੇ ਸੁਣ ਕੇ ਉਵੇਂ ਮੰਨੀ ਜਾਂਦਾ ਨਾ ਉਹਨਾਂ ਤੇ ਅਸਰ ਵੀ ਕੋਈ ਨਹੀਂ ਪੈਂਦਾ ਗੁਰਬਾਨੇ ਮੰਨਦੇ ਉਹ ਨੇ ਜਿਨ੍ਹਾਂ ਨੇ ਪਰਖੀ ਹੈ ਗੁਰਬਾਨੇ ਜਾ ਵਰਨਵੰਦ ਕੜਾਇਨ ਉੱਠ ਕੇ ਭੱਜਾਂ ਦਾal ਨਹੀਂ ਸੜੇ ਟੈਕਨਾਲ ਪਰਸੀਓ ਜੀ ਤਾਂ ਕਹੇ कहता ਕੱਟ ਰਹਾ ਇਹ ਵੇ ਕਿ ਮੈਂ ਕਹਿੰਦਾ ਉਹ ਨੂੰ ਜਾ ਕਹਿ ਗਲਾ ਹੈ ਟੈਕਟਿਕਲ ਜਿਹਦੇ ਵਿੱਚ ਖੜੇ ਉੱਤਰੇ ਹੋਏ ਸੀ ਉਹ ਲੋਕ ਜਿਹੜੇ ਪਰਖਦੇ ਨਹੀਂ ਉਹ ਨਹੀਂ ਘਰੇ ਉਤਰ ਸਰਦੇ ਜੇ ਪਰਖਦਾ ਨਹੀਂ ਗੁਰਬਾਨੀ ਨੂੰ ਸੁਣਦਾ ਉਹ ਤੁਰਦਾ ਵੀ ਗਾਣਾ ਹੈ ਦੀ ਤੁਰਦਾ ਹੀ ਪਰਖਣਾ ਕੋਈ ਹੌਸਲੇ ਦੀ ਮੰਨਦਾ ਤੋਂ ਜਿਹੜੀ ਨਰੀਅਤ ਦੇ ਮੰਦੀ ਜਿਹੜੀ ਆਪਾਂ ਫੋਜ ਕਰਦੇ ਹਾਂ ਬਾਗ ਸਾਈਡ ਦੀ ਜਿਹੜੀ ਪਰਖ ਲੈਣੇ ਆ ਪਰ ਗੱਲ ਹੈ ਤਾਂ ਹੀ ਆਪਾਂ ਤਾਂ ਬੱਧੀ ਹੋਈ ਆਪਾਂ ਜਰਾ ਬਣਾਇਆ ਚਾਰ ਤੇ ਪਹੁੰਚੇ ਹੀ ਫਿਰ ਆਪਾਂ ਜਿੱਨਾ ਜਦ ਪਹੁੰਚਦੇ ਨੇ ਜਦ ਆਪਾਂ ਉਹਦੇ ਪਿੱਛਾ ਹਟ ਕੇ ਨਾ ਕਰਾਂ ਸੋ ਆਤਾ ਯਾਦ ਕਰਦੇ ਨੇ ਪਹਿਲਾਂ ਜਾਨਵਰ ਤੇ ਉਹ ਛੜਦੇ ਕਿੰਨਾ ਕੁਝ ਕਰਕੇ ਪਰਖ ਕੇ ਫਿਰ ਆਦਮੀ ਨੂੰ ਭੇਜਦੇ ਅਗਰੇ ਤੇ ਤਸੱਲੀ ਹੋ ਜਾਂਦੀ ਹੈ ਤਸੱਲੀ ਹੁੰਦੀ ਹੋ ਮੰਦੀ ਤਾਂ ਇਹ ਪਰਖੇ ਪਰਖੇ ਬਿਨਾਂ ਨਹੀਂ ਤਸੱਲੀ ਆਦਮੀ ਨੂੰ ਵੀ ਪਰਖਦੇ ਆਦਮੀ ਨੂੰ ਵੀ ਪਰਖਦੇ ਪਰਖੇ ਤਾਂ ਵਿਸ਼ਵਾਸ ਕਰਦੇ ਆ ਪਰ ਕੁਝੇ ਪਰਖੇ ਬਿਨਾਂ ਤਾਂ ਵਿਸ਼ਵਾਸ ਕਰਦਾ ਹੀ ਨਹੀਂ ਕੋਈ ਕਿਸੇ ਤੇ ਔਰ ਕਰਨਾ ਚਾਹੀਦਾ ਵੀ ਹੈ ਦੀ ਧੋਖਾ ਖਾਣ ਦਾ ਹੈ ਜੋ ਬਿਨਾਂ ਪਰਖੇ ਤੇ ਵਿਸ਼ਵਾਸ ਕਰਦਾ ਹੈ ਧੋਖਾ ਖਾਣ ਆ ਜਿੰਨੇ ਵੀ ਸੁਣਦਾ ਕੋਈ ਧੋਖਾ ਖਾਤਾ ਉਹਨੇ ਖਾਦਾ ਪਰਖਿਆ ਹੈ ਜਿੱਦ ਤਰੂ ਉਹਨੇ ਅੰਧ ਵਿਸ਼ਵਾਸ ਕਰ ਲਿਆ ਜਿੱਤੇ ਅੰਧ ਵਿਸ਼ਵਾਸ ਕਰਦਾ ਉਤੇ ਧੋਖਾ ਹੋਊਗਾ ਫਿਰ ਉਹੀ ਮਤ ਤੁਸੀਂ ਉਹ ਤਾਂ ਕਹਿੰਦਾ ਹੀ ਸੀ ਕਿ ਬੋਲਤੀ ਜੋ ਹੁੰਦਾ ਉਹ ਕਹਿੰਦਾ ਤੇਰੇ ਵਾਲੀ ਮੂਰਤੀ ਹੈ ਉਹ ਹੈ ਉਹ ਤਾਂ ਮੂਰਤੀ ਦੀ ਉਹ ਪ੍ਰਤਿਮਾ ਹੈ ਮੂਰਤੀ ਕਿੱਥੇ ਆਹੋ ਮੂਰਤੀ ਨਹੀਂ ਆਹੋ ਉਹ ਪ੍ਰਤਿਮਾ ਦੀ ਅਸਲ ਦੀ ਮੂਰਤੀ ਨਹੀਂ ਹੁੰਦੀ ਉਹ ਮੂਰਤੀ ਸਰੀਰ ਹੁੰਦਾ ਜਿਉਂਦਾ ਕਹਿੰਦਾ ਕਿੰਨੀਆਂ ਮੂਰਤੀਆਂ ਆਈਆਂ ਨੇ ਸੱਤ ਬੋਲ ਲੈ ਮੂਰਤੀ ਜਦੋਂ ਸਰੀਰ ਨੂੰ ਕਹਿੰਦੇ ਮੂਰਤੀ ਹਾਂ ਸੱਚੀ ਮੂਰਤੀ ਹੀ ਹੈ ਉਹ ਝੂਠੀ ਮੂਰਤੀ ਮਨੁਸੀਂ ਮੂਰਤੀ ਕਹਿੰਦੇ ਹੋ ਉਹ ਨਹੀਂ ਉਹ ਸੰਤਾ ਦਾ ਇਹ ਹੈ ਬੋਲੀ ਤਿੰਨਾਂ ਮੂਰਤੀਆਂ ਨਾਲ ਜੀ ਕਹਿੰਦੇ ਤੁਸੀਂ ਉੱਠੇ ਬੋਲਦੇ ਨੀਓ ਅਸਲ ਤੋਂ ਬੋਲੀ ਇਹੀ ਹੈ ਉਹਦੀ ਵੀ ਆਹ ਮੂਰਤੀ ਪੱਥਰ ਵਾਲੀ ਅਸੀਂ ਅਜੇ ਦੂਜੀ ਬਣਾਈ ਰੱਖ ਲਈਏ ਮੂਰਤੀ ਛੱਡ ਦੀ ਕੱਲ ਠੀਕ ਸੀ ਇਹ ਮੂਰਤੀ ਹੈ ਇਹ ਜੋ ਮਰਦਾ ਹੈ ਪਰ ਮੂਰਤੀ ਤਾਂ ਲਖਲੀ ਬਣਾਂਦੀ ਨਾ ਪ੍ਰੋਬਲਮ ਕੁਛ ਨਹੀਂ ਆਵੇ ਥੋੜਾ ਜਿਹਾ ਇਹ ਫਰਕਾ ਕੱਖ ਦੇ ਉਹਦੇ ਇਲਖ ਹੋਇਆ ਹੋਇਆ ਫਰਕ ਪਰ ਕੁਝ ਨਹੀਂ ਆਇਆ ਇਸ ਕਰਕੇ ਲੋਕ ਮੰਨ ਗਏ ਇਸ ਕਰਕੇ ਲੋਕ ਮੰਨ ਗਏ ਉਹ ਕਹਿੰਦੇ ਕਿ ਗੱਲ ਤਾਂ ਠੀਕ ਹੈ ਤੂੰ ਮੁਰਤੇ ਜਿਹੜੀ ਤੇਰੀ ਮੁਰਤੇ ਇਹ ਤਾਂ ਵੀ ਚੱਲ ਇਹਦੇ ਚ ਹੈਗਾ ਚੁੜੀ ਫਾਟੀ ਦਾ ਕੈਸੇ ਨੱਚਦਾ ਇਹਦੇ ਚ ਹੈ ਉਹ ਨੱਚ ਕੇ ਦਿਖਾ ਉਹ ਜਿਹੜੀ ਮੂਰਤੀ ਦੀ ਤੂੰ ਪੂਜਾ ਕਰਦਾ ਉਹ ਤਾਂ ਆਪਣਾ ਮੂੰਹ ਨਹੀਂ ਸਾਫ਼ ਕਰ ਸਕਦੀ ਆਏ ਗੱਲਾਂ ਇਹ ਕਿਆਂ ਮੂਰਤੀ ਵੇਚੀ ਨਹੀਂ ਕੀਤੀ ਮੂਰਤੀ ਵੇਚੀ ਤੁਸੀਂ ਕੀਤੀ ਹੈ ਅਗਲੀ ਮੂਰਤੀ ਬਣਾ ਲਈ ਅਸਲੀ ਨੂੰ ਛੱਡ ਕੇ ਉਹ ਤਾਂ ਉਹਨਾਂ ਨੇ ਕੀਤੀ ਹੈ ਵੇਚੀ ਸਾਨੂੰ ਢੀਚ ਕਹਿੰਦੇ ਨੇ ਅਸਲੀ ਮੂਰਤ ਨੂੰ ਢੀਚ ਬਣਾਤਾ ਉਹ ਮੂਰਤੀ ਸੋਨਾ ਦੀ ਆ ਕੋਈ ਚੀਜ਼ ਨਹੀਂ ਬਣਾ ਕੇ ਉਹ ਮੂਰਤੀ ਪੂਜਾ ਕਰਦਾ ਇਹ ਬਲੈਕਮੇਲ ਸੀ ਹੋਰ ਕੁਝ ਨਹੀਂ ਜੋ ਡੁਪਲੀਕੇਟ ਨੂੰ ਜਵਾਬ ਆਹ ਭਈ ਉਹਨਾਂ ਨੇ ਆਪਣਾ ਮੈਜਨਾ ਚਲਾ ਰਿਆ ਤਾਂ ਸਾਜ ਲਗਿਆ ਉਹਨਾਂ ਦਾ ਵਧੀਆ ਮੈਂ ਵੀ ਚੱਲ ਰਹੀ ਹਾਂ ਸੰਤ ਕੀ ਟਹਿਲ ਸੰਤ ਸੰਗ ਹੈ ਨਹੀਂ ਮਿਲਦਾ ਉਹ ਲੈਣੇ ਪਹਿਲਾਂ ਸੀ ਉਹ ਫੋਟੋਆਂ ਜਿਹੜੀ ਸਟੈਡ ਮਹਾਲੀ ਮੂਰਤੀ ਚ ਮੜਦਾ ਤੇ ਉਹ ਫੋਟੋਆਂ ਮਿਲ ਜੂਗੀ ਜੇ ਉਹਦੀ ਅਫਰਲੀ ਤਹਿਲੀ ਹੋਈ ਤਾਂ ਹੀ ਬਹਿ ਗਿਆ ਕਹਾ ਗਿਆ ਜੀ ਫਰਤ ਮੰਨ ਕੇ ਚੱਲ ਸੀ ਜਾਦੋਂ ਉਹਦੇ ਆਲੀ ਦਿਖਾਈ ਜਾਂਦਾਂ ਵਾਲੀ ਬੱਟ ਆਪਣੇ ਆਲੀ ਹਨ ਵੀ ਗੱਲ ਠੀਕ ਹੈ ਦੂਤ ਉਰਕੇ ਚਲਾ ਗਿਆ ਕਿੰਨੀ ਦੂਰ ਸੇੜਾਲੀ ਮੂਤੋਂ ਤੱਕ ਉਤੋਂ ਕੇ ਤੱਕ ਤੂੰ ਦੱਸ ਸਕਦੇ ਏ ਕਾਰਾ ਕਿ ਸੱਚੀ ਹੈ ਉਤੋਂ ਚੱਲੇ ਤਾਂ ਤੁਹਾਨੂੰ ਘਰ ਵੀ ਦਰਸ਼ਨ ਤੇ ਸਕੀਏ ਫਿਰ ਕਿ ਉੱਥੇ ਜਾ ਕੇ ਦਰਸ਼ਨ ਕਰਨ ਨਾਲ ਕੋਈ ਨਹੀਂ ਹੈ ਉਦੋਂ ਤਾਂ ਕੋਈ ਬੱਦਾ ਹੋਵੇ ਸ੍ਰੀ ਆਦ ਤੇ ਤੁਹੇ ਪਤਾ ਲੱਗ ਜੇ ਵੀ ਤੇਰਾ ਭਗਤ ਉੱਥੇ ਬੈਠਾ ਆਪ ਆ ਕੇ ਦੇ ਸਕਦਾ ਤੇ ਨੂੰ ਆ ਕੇ ਪਰ ਇਹ ਜਮਾਂ ਦੇ ਤੂੰ ਇਹ ਕਿਈ ਤਰਕ ਕਰਦੇ ਕਰਨਾ ਪਾਪ ਸਰ ਨਹੀਂ ਸਰਦਾ ਸਰਕ ਕਰਨਾ ਦਰਸ਼ਨ ਤਾਂ ਬਾਪ ਸਰ ਟੀਕਾ ਲਾਉਂਗਾ ਪਰ ਜਿਹੜਾ ਕੋਮਪੇਨੇਟਰ ਨੂੰ ਲਾ ਪਰ ਚ ਗਿਆ ਜਿਹਨੂੰ ਜਿਹੜਾ ਪਰ ਤੇਰੀਆ ਦਾ ਕਹਿੰਦੇ ਨਹੀਂ ਉਹਨੂੰ ਤੇਰੀਆ ਕਥਿਆਦੂ ਉਹਦੇ ਵਾਸਤੇ ਹੋਰ ਆਇਆ ਹੈ ਹਾਰੀ ਆਇਆ ਹੈ ਹਾਰੀ ਲਫਜ਼ ਆਇਆ ਉਹਦੇ ਵਾਸਤੇ ਤੇਰੀਆ ਤਾਂ ਆਇਆ ਹੀ ਬਾਣੀ ਤੇਰੀਆ ਲਫਜ਼ ਨਹੀਂ ਆਇਆ ਉਹਦੇ ਵਾਸਤੇ ਹਾਰੀ ਆਇਆ ਕਰਕੇ ਨਾਲ ਤੇ ਅੱਗੇ ਹੁੰਦਾ ਉਧਵੀ ਨਾਲ ਆਇਆ ਤਾਂ ਉਹ ਤੇ ਦੋ ਆਏ ਨੇ ਡਬਲ ਆਪਾਂ ਉਥੇ ਜਿਹੜਾ ਫਿਜ਼ੀਕਲ ਬਹਾਲੀ ਹੈ ਆਪਾਂ ਸਮਾਜਿਕ ਤੌਰ ਤੇ ਕਰਕੇ ਨਾਲ ਆਪਾਂ ਜਿਹਨੂੰ ਕਹਿੰਦੇ ਆ ਉਹਦੇ ਨਾਲ ਕੰਪੈਰੀਜ਼ਨ ਕਰਨ ਵਾਸਤੇ ਉਹਨੂੰ ਉਹ ਅਭਿਯਮਾਂ ਅੰਦਾ ਹੋਊਗੀ ਪਰ ਨਾਲੇ ਜੋ ਕਹ ਲੈ ਤਦ ਜਿਵੇਂ ਸਵਾਦ ਦੇ ਵਿੱਚ ਅਸੀਂ ਉਹਨੂੰ ਬੁਰਾ ਸੋਚਦੇ ਆ ਇਹੋ ਜਿਹੇ ਦੁਆਦਾਰ ਦੇ ਘਾਹ ਉਹਨੂੰ ਬੁਰਾ ਬਣਨੇ पागल गणते ने सुद्धा गणते ने बेखूब गणते ने मूर्ख गणते ने असी समाज विच गणदेया जितने ऐवें दरगा दे विचो मूर्ख हुणा ओ क प्रेज़ेंट करके दिखाया नारी लफ्ज़ बरते बरते क्रिया तो बरते ही नहीं है क्रिया तो उथे बरता है आज्ञा देने अल्प सुख छाड़ परम सुख पावा ਜਦੋਂ ਅਲਪ ਸੁੱਖ ਦਾ ਤਿਆਗ ਕਰ ਦਿੰਦਾ ਹੈ ਪਰਮ ਸੁੱਖ ਦਾ ਜਿਹੜੀ ਆ ਉਹਦੀ ਪ੍ਰਾਪਤੀ ਕਰ ਲੈਂਦਾ ਹੈ ਫਿਰ ਇਹ ਜਰੀਆ ਉਹ ਕਿੰਸੇ ਕਹੋ ਆ ਇਹ ਜਿਹੜੀ ਜਰੀਆ ਨਹੀਂ ਹੈ ਇਹ ਜਿਹੜਾ ਹੈ ਆਪ ਉਹ ਕੱਟਾ ਗੁਰੂ ਸੋਤ ਤਰੀਆ ਸ਼ਬਦ ਵਸਦਾ ਹੈ ਸਰਤਰੀਆ ਰੋਬਨਾ ਪੇਖੇ ਨੇਤਰ ਆਪਤਰੀਆ ਧੁਜੀ ਗੜੀ ਮੱਤ ਆ ਕੇ ਸਦੀ ਮੱਤ ਬੁਗਾਨੀ ਮੱਤ ਉਹ ਦਾ ਬਿਲਕੁਲ ਉਹਨੂੰ ਸਮਝਣ ਦੀ ਲੋੜ ਨਹੀਂ ਨੇਤਰ ਨਾਲੇ ਅੱਖਾਂ ਤਾਂ ਹੈ ਨਹੀਂ ਇਥੇ ਨੇਤਰ ਤਾਂ ਮੇਰੀ ਅੱਖ ਹੁੰਦੀ ਹੈ ਤੇਖਾਂ ਦੇਖੇ ਅੱਧੇ ਅੱਖਾਂ ਬਾਹਰ ਨਾਲ شریف ਹੋਣੀ ਜੀ ਬਈ ਲਾਵੇ ਨੇਤਰੇ ਵਰਕੇ ਐ ਅਖਰੀ ਵਕਤ ਅੱਖਾਂ ਬਾਝੋਂ ਵੇਖਣ ਦੀ ਗੱਲ ਦੂਜੀ ਮੱਤ ਦਾ ਜਲਹ ਗਿਆਨ ਉਹਨਾਂ ਸੱਜਣਾਂ ਦੀ ਕੋਸ਼ਿਸ਼ ਨਾ ਕਰ ਸੱਚ ਜੜ ਦੇ ਉਹਨਾਂ ਢੇੜੇ ਨਾ ਜਾਵੇ ਸਮਝਣ ਵਾਲੇ ਪਾਸੇ ਹਾਂ ਸਾਦਗੀ ਟਹਿਲ ਸੰਤ ਸੰਗ ਹੀ ਇਹਨਾਂ ਨੂੰ ਇਸ ਗੱਲ ਨੂੰ ਇਹਦੇ ਵਿੱਚ ਗੱਲ ਹੈ ਇੱਥੇ ਇਸ ਗੱਲ ਦਾ ਬਿਸਤੂ ਬਹੁਤ ਕੀਤਾ ਉਹਨਾਂ ਨੇ ਵੀ ਲਿਖਿਆ ਕੁਰਾਨ ਵਾਲਿਆਂ ਨੇ ਕੁਰਾਨ ਇਸਲਾਮ ਤੋਂ ਬਿਨਾਂ ਸੁਣਨਾ ਹਰਾਮ ਹੋਇਆ ਇਹਨਾਂ ਨੇ ਹਰਾਮ ਨਹੀਂ ਕਿਹਾ ਹੋਇਆ ਪੱਥਰੀਆ ਰੂਪਨ ਤੱਕ ਨਿਕਲ ਆਰਾਮ ਰੂਪ ਨਹੀਂ ਕਿਹਾ ਹੈ ਟਾਈਮ ਵੇਸਰ ਕਰੇ ਉਹਨੇ ਖਾਪੇ ਨੁਕਸਾਨ ਹੋ ਜਾਊਗਾ ਇਹ ਗੱਲ ਕਿਹਾ ਉਹਨਾਂ ਨੇ ਕਿਹਾ ਹਰਾਮ ਬੰ ਉਹਨਾਂ ਨੇ ਕਿਹਾ ਠੀਕ ਮਤ ਬਣਾ ਸੁਣ ਲਿਓ ਜਿਹੜੇ ਪਰਦੇ ਦੀਆ ਗਿਆ ਉਹਨਾਂ ਨੇ ਸਵਾਮ ਦੀ ਗੱਲ ਕਰਤੀ ਹਾਂਜੀ ਸਾਧ ਕੀ ਟਹਿਲ ਸਭ ਜਾਨੀ ਨਾ ਤੁਹਾਂਗੇ ਕਿ ਜਿੱਥੇ ਇਹਦੇ ਗਿਆਨ ਤੋਂ ਆਤਮ ਗਿਆਨ ਤੋਂ ਉਹ ਗਵਾਨੀ ਮਤੋਂ ਨਹੀਂ ਜੀ ਆਤਮ ਗਿਆਨ ਤੋਂ ਘਟਵੀਂ ਗੱਲ ਆ ਉਹ ਦੇਖੀ ਨਾ ਟਹਿਲ ਸੰਤਾਂ ਦੇ ਟਹਿਲ ਟਹਿਲ ਕੀ ਕਰੇ ਸਾਧ ਦੀ ਸਾਧਕਾਂ ਨੇ ਕਰਕੇ ਸਾਧਾ ਹੁੰਦੇ ਜਿਹੜਾ ਮਨ ਬਦਲਵੇ ਹੈ ਇੱਛਾ ਰੱਖਦਾ ਬਦਲਦੀ ਆਪਣੇ ਆਪ ਨੂੰ ਓੱਖਾ ਜਿਹਦਾ ਦੇ ਨਾਮ ਦੀ ਬੁੱਧੀ ਉਹਦੀ ਗੱਲ ਕਰੇ ਉਹਦੇ ਤੇ ਟਾਈਮ ਬੇਸ ਕਰੇ ਉਹਦੇ ਤੇ ਮਿਹਨਤ ਕਰ ਲਵੇ ਆਪਣੇ ਮਨ ਸੇ ਆਪਣਾ ਕਿੱਥੇ ਬਦਲਣਾ ਹੈ ਜੇ ਕੋਈ ਲੈਣ ਦਾ ਮਨ ਬਦਲ ਰਿਹਾ 14 ਉਹਦੇ ਨਾਲ ਕਿੰਨੇ ਘੰਟੇ ਉਹਦੀ ਤਿਆਰ ਕਰਨ ਨਾਲ ਉਹ ਤੇ ਮੈਂ ਨਹੀਂ ਦੀ ਕਰੀਦੀ ਸੀ ਸੇਵਾ ਆ ਤੇ ਕੋਈ ਗੱਲ ਸਾਰੀ ਕਿਤੇ ਸਾਂਤ ਸੰਗੇ ਕਰੇ ਉਹ ਸਾਖੀ ਤੇ ਹਲ ਕਰਦੀ ਲੋੜ ਨਹੀਂ ਉਹ ਨੂੰ ਗੱਲ ਕੀ ਹੈ ਜਿਹੜਾ ਇੱਛਾ ਕੈ ਸਮਝਣਾ ਉਹਦੇ ਤੇ ਤਾਂ ਜਿੰਨਾ ਮਰਜੀ ਦਾ ਐਮੇਸ ਕਰ ਲੋ ਪਰ ਜਿਹੜਾ ਇੱਛਕ ਦੀ ਐਨਰਜੀ ਵੇਸ ਕਰਦੀ ਲੋੜ ਉੱਥੇ ਲੋੜ ਕਿਹਾ ਨਹੀਂ ਹੋਇਆ ਕਬੀਰ ਦਾ ਉਹੀ ਗੱਲ ਹੈ ਨੇ ਰਾਹ ਪਦਾਰਥ ਪਾਇ ਕੇ ਗਵੀਰਾ ਕਾਂਠਾ ਖੋਲ ਨਹੀਂ ਪਟਣ ਨਹੀਂ ਪਾਰ ਖੂ ਨਹੀਂ ਰਾਸ ਤੇ ਨਹੀਂ ਮੋਲ ਕੀ ਲੋੜ ਐ ਰਜੀਵੇਸਰ ਹਾਂ ਉੱਥੇ ਰਜੀਵੇਸਰ ਦੀ ਲੋੜ ਹੈ ਜਿੱਤੇ ਕੀ ਤਹਿ ਸੰਤ ਸਾਖੇ ਰਹੇ ਸੰਤ ਸਾਖੇ ਰਹੇ ਸੰਤਾਂ ਦੇ ਨਾਲ ਰਹੇ ਰਹਿਦ ਰਖੋ ਦੇ ਅੰਦਰ ਸ਼ਰਧੀ ਹੈ ਮਾਇਆ ਦੀ ਭੁੱਖ ਨਹੀਂ ਹੈ ਉਹਨਾਂ ਦੇ ਨਾਲ ਲਖੋ ਪ੍ਰੇਮ ਜਿਹੜੇ ਮਾਇਆ ਦਾਰੀ ਨੇ ਮਾਇਆ ਦੇ ਵੱਡੇ ਵੱਡੇ ਦੇਦੇ ਬਣਾਉਣ ਵਾਲੇ ਮਾਇਆ ਦੇ ਰਾਜ ਦੀ ਗੱਲ ਕਰਨ ਵਾਲੇ ਉਹਨਾਂ ਤੋਂ ਹਜ਼ੂਰੀ ਬਣਾ ਕੇ ਰੱਖੋ ਆਪਣਾ ਨਗੀਲਾ ਨਾ ਕਰਦੇ ਜਾਣ ਉਹ ਚਲਾਉਣ ਚਾਹੇ ਘੋੜੀਆਂ ਚਲਾਉਣ ਸਿੱਧੀਆਂ ਚਾਉਣ ਜਾਏ ਪੁੱਠੀਆਂ ਚਲਾਉਣ ਠੀਕ ਹੈ ਜੀ ਆਪਣਾ ਨਗੀਲਾ ਤਰਨਾ ਸੁਨੇ ਕਾਹੂ ਕੀ ਨਿੰਦਾ ਹਾਂ ਜਿਹੜੇ ਕਲਨ ਦੇ ਬਦਲੇ ਕਾਨੂੰਨ ਦੇ ਨਾ ਸੁਣਨਾ ਕਾਹੂ ਕਿ ਨੰਦਿਆ ਸੁਣਦੀ ਇੱਛਾ ਜਿਹੜੀ ਆ ਨਾ ਇਹ ਨਾਲੇ ਤੇਿਆ ਨਹੀਂ ਸੁਣਦੀ ਕਿਸੇ ਤੇਿਆ ਨਾ ਸੁਣਦੀਆਂ ਨਾ ਕੱਢੀਏ ਬਾਤਾਂ ਇਹਨੂੰ ਉਹਦੇ ਰਹੀਆਂ ਕਿ ਸਾਨੂੰ ਪੁੱਠੀ ਜੇ ਜਾਂਦਾ ਪੁੱਠੇ ਪਾਸੇ ਨੂੰ ਸਿੱਧੀ ਬਾਤ ਦੇਣੀ ਆ ਉਹ ਜੇ ਉਹਨੂੰ ਨੰਦਿਆ ਸਮਝ ਲਵੇ ਉਹਦੀ ਗੱਲ ਸੀ ਫੇਰ ਜਿਹੜੂ ਉਹ ਨੰਦਿਆ ਸਮਝਦਾ ਕੋਈ ਫੇਰ ਉਹ ਨੰਦਿਆ ਹੈ ਜੀ ਵਸੇ ਜੇ ਕੋਈ ਖੂਚ ਦੇ ਰੂ ਬਚਾ ਲਵੇ ਉੱਠੇ ਪਾਸੇ ਜਾਣ ਨੂੰ ਬਚਾ ਲਵੇ ਇੱਧਰ ਪਾਈ ਚੱਲਿਆ ਤਾਂ ਤੂੰ ਹਾਂ ਇਧਰੋਂ ਮੁੜ ਕੇ ਤਾਂ ਆਇਆ ਨਹੀਂ ਇਧਰੋਂ ਕਿਹਾ ਮੁੜ ਕੇ ਨਹੀਂ ਆਇਆ ਆਸੋ ਤਾ ਥੋੜਾ ਇੱਥੇ ਮੰਨ ਲਓ ਮੈਂ ਅ ਗਾਂਵ ਨੇ ਪਹੁੰਚ ਜੇ ਉਹ ਕਹਿ ਵੀ ਫਿਰ ਖੜ ਜਿਵੇਂ ਵੀ ਫਿਰ ਰਾਤ ਹੀ ਕਿਹੜਾ ਆਹ ਰਾਤ ਚੱਲੇਗਾ ਜੋ ਇੰਦੀ ਗੱਲ ਦੇ ਬਾਵਜੂਦ ਪੁੱਛਦਾ ਹੈ ਵੀ ਰਾਤ ਇਹਦਾ ਮਤਲਬ ਇਹਨੂੰ ਪਤਾ ਹੋਊ ਰਾਦਾ ਫਿਰ ਜੇ ਗਾਹ ਗੱਲ ਸ਼ੁਰੂ ਕਰਦਾ ਹੋਂ ਉਸ ਗੱਲ ਤੇ ਵੀਰਾਤ ਆਹ ਹੈ ਇਹ ਤਾਂ ਬਹੁਤ ਉੱਪੜ ਗਏ ਐਸਰਾ ਕੋਈ ਨਹੀਂ ਪੁੱਛਿਆ ਐਤਾ ਹਾਂ ਕਰਨਾ ਸੁਣੇ ਸਭੂ ਕੀ ਸਭ ਤੇ ਜਾਣੇ ਆਪਸ ਕੋ ਸਭ ਤੇ ਜਾਣੇ ਆਪਸ ਕੋ ਆਪਣੇ ਆਪ ਨੂੰ ਸਾਰਿਆਂ ਨੂੰ ਕੋਈ ਜੰਦਾ ਨਾ ਰਮਨ ਫਿਰ ਵੀ ਠੀਕ ਹੈ। ਆਪ ਸਰਲ ਮੁੱਦਾ ਹੀ ਮਨੈ। ਆਪ ਕੋ ਸਭ ਤੇ ਜਾਣੇ ਆਪ ਕੋ ਮੰਗਦਾ। ਬੁੱਧਾ ਕੈਸੇ ਟਿਕਣਾ ਜਾਣੇ। ਬੁੱਧਾ ਪਾਏ ਮੇਰਾ। ਰੇਟ ਬੰਦਾ ਮੇਰਾ। ਫੇਜ ਜਿਵੇਂ ਸੌਦਾ ਵੇਚਦਾ ਕੋਈ। ਮੰਦਾ ਕੌਣ ਵੇਚਦਾ? ਰੇਡੋਂ ਤੇਜ਼ ਰੀਣਾ ਉਹ ਬੰਦਾ ਰੇਟ ਲੰਦਾ ਆਪਣੀ ਨੂੰ ਤਾਂ ਬੁਰਾ ਨਹੀਂ ਬੰਦਾ ਹਾਂ ਉਹ ਬੰਦਾ ਆਉਂਦਾ ਰੇਟ ਸਭ ਤੋਂ ਸਸਤਾ ਹੈ ਉਹਦਾ ਫਰੀਜ ਚਾਈ ਜਾਂਦਾ ਦਰਿਆ ਪਾਣੀ ਮੰਦਾਈ ਵੇਚਦਾ ਕੁਮੈ ਦਾ ਜਾ ਕੇ ਤਾਂ ਗਲਣਾ ਪੈਂਦਾ ਹੀ ਆ ਵੀ ਇੰਨਾ ਕੁ ਤਾਂ ਹੈ ਉਹ ਨੀ ਨਾ ਤਾਂ ਤੁਹਾਨੂੰ ਸਾਜੀ ਮੰਦੀ ਹੋ ਗਈ ਅੱਜ ਸਾਜੀ ਮੰਦੀ ਹੋ ਗਈ ਸਭ ਤੇ ਜਾਣੇ ਆਪਸ ਕੋ ਮੰਦਾ ਯਾਨੀ ਜਿਹੜੇ ਬੜੇ ਬੜੇ ਗੁਰੂ ਬਣੇ ਬੈਠੇ ਨੇ ਉਹਨਾਂ ਦਾ ਬੋਲ ਜਿਆਦਾ ਹੈ ਉਹਨਾਂ ਗੱਲ ਦੱਸਣ ਵਾਸਤੇ ਕੋਈ ਬੋਲਾਂ ਕੁਝ ਮੰਗਣਾ ਨਹੀਂ ਹੋ ਹੈ ਕਾਲੇ ਦਸਣਵਾ ਅਮਰੀਆ ਹਾਂ ਮੈਂ ਬੰਦਾ ਆਇਆ ਨਾ ਮੰਗਲ ਨੂੰ ਨਹੀਂ ਕਹਿੰਦੇ ਨਾ ਨਾ ਸਭ ਤੇ ਜਾਣੇ ਆਪਸੋ ਮੰਗਾ ਹਾਂ ਕਰਨ ਨੂੰ ਸਮੇਂ ਕਹੂਗੀ ਸਭ ਤੇ ਜਾਣੇ ਆਪਸੋ ਮੰਗਾ ਮਤਲਬ ਆਪਣੀ ਕੋਈ ਇਹ ਨਾ ਕਰ ਵੀ ਮੈਨੂੰ ਕੁਰਸੀ ਇੱਥੇ ਮੈਨੂੰ ਪਹਿਲੀ ਲਾਈਨ ਚ ਨਹੀਂ ਬਿਠਾਲਿਆ ਦੂਜੀ ਜਿੱਥੇ ਬਿਠਾਲਿਆ ਜਦੋਂ ਮੈਂ ਹੁੰਦਾ ਨਾ ਉਹ ਉਹ ਉਸੇ ਜਿਹੀ ਬਿਠਾ ਲਿਆ ਉਸੇ ਜਿਹੀ ਆਹ ਕੁਰਸੀ ਉਸ ਤਰੀਕੇ ਨਾਲ ਜਿਵੇਂ ਕੱਲ ਲੜਦੇ ਮੈਚ ਤੇ ਸੀ ਆਹੋ ਉਹ ਫਿਰ ਉਹ ਕਾਇਬੀ ਚਲੋ ਕੋਈ ਵੀ ਵੇਖਦਾ ਹਾਂ ਗੁਰਪ੍ਰਸਾਦ ਵਿਖਿਆ ਪਰ ਹਰੇ ਗੁਰਪ੍ਰਸਾਦ ਵਿਖਿਆ ਪਰ ਹਰੇ ਜਿਹੜੀ ਵਿਖਿਆ ਹੈ ਆਇਆ ਇਹ ਤਾਂ بچੋ ਕੇ ਬਚ ਰਹੇ ਇਹ ਤਾਂ ਕਿਵੇਂ ਬਚ ਕੇ ਰਹੇ ਪਰ ਹਜ਼ਰਤਾਂ ਨਾਲ ਬਚ ਕੇ ਰਹੇ ਇਹਦੇ ਪ੍ਰਹਾਰ ਤੋਂ ਬਚ ਕੇ ਰਹੇ ਪ੍ਰਹਾਰ ਕਰਦਾ ਕੋਈ ਉਤੇ ਅਗਰ ਪਿਛੇ हट ਜੂ ਜਾਂ ਉਹ ਢਾ ਲੂ ਮੂਰੇ ਕੋਸਾਂ ਬੁਕਰੂ ਰੁਕੂ ਜੇ ਪ੍ਰਹਾਰ ਲੂਆ ਤਾਂ ਕਿਆ ਤੋਂ ਪਰੇ ਹੁਜੂ ਕਿਹਨਾਂ ਪਜੂਗਾ ਕਿਹਿਆ ਪ੍ਰਹਾਰੇ ਗੁਰਪ੍ਰਸਾਦ ਆਪਣੇ ਗਿਆਨ ਦੇ ਨਾਲ ਜਿਹੜਾ ਆਪਣਾ ਗਿਆਨ ਹੈ ਆਮਾ ਯਾਰ ਉਪੇ ਨਾ ਗੜੀ ਤੋਂ ਬਚ ਕੇ ਰਹੇ ਨਿਗਰ ਰਖੇ ਜੇ ਜੇਜੇ ਇਹ ਜੀ ਨਿਗਰ ਰੱਖੇ ਪਤਨ ਗੜੇ ਵਲੇ ਨੇ ਇਹ ਤਾਂ ਸਿਲੰਦੀ ਹੈ ਰਹੇ ਸ਼ਰੀਰ ਦੀ ਸੰਗਤ ਆ ਸ਼ਰੀਰ ਤੋਂ ਬਚ ਕੇ ਰਹਿਣਾ ਸ਼ਰੀਰ ਧੀਆਂ ਲੋੜਾਂ ਤੋਂ ਵੀ ਬਚ ਕੇ ਰਹਿਣਾ ਸ਼ਰੀਰ ਧੀਆਂ ਲੋੜਾਂ ਨੇ ਕੋਈ ਨਾ ਕੋਈ ਸੇਪਾ ਪਾਉਂਦੇ ਦਿੱਲ ਤੋਂ ਜਿੱਦਣ ਵੀ ਪਹੁਣਾ ਆ ਗਿਆ ਲੋੜਾ ਨੇ ਕੋਣਾ ਸੱਪ ਇਹਦੇ ਬਚ ਕੇ ਰਹੇ ਉਹ ਤਾਂ ਅੱਖ ਇਹ ਵਿਖਿਆ ਯਾਦਰੀ ਇਹ ਅਹ ਵਿਖਿਆ ਬੋ ਮੋਹਿਆ ਵਿਖਿਆ ਬੋ ਮੋਹਿਆ ਹੋਇਆ ਉਹ ਤਾਂ ਬਚ ਕੇ ਰਹੇ ਹਾਂ ਹਾਂਜੀ ਉਹਰ ਪਰ ਸਾਧ ਵਿਖਿਆ ਪਰ ਹਰੇ ਲੋੜ ਨੂੰ ਅਸੀਂ ਭੁੱਖ ਨਹੀਂ ਬਣਾਉਂਦੇ ਨਾ ਇਹ ਸ਼ਾਂਤੀ ਬਣਾਉਂਦੇ ਨਾ ਸ਼ਾਂਤੀ ਬਣਦੀ ਹੈ ਲੋੜ ਭੁੱਖ ਬਣਦੀ ਹੈ ਈਸ਼ਾਨ ਬਣਦੀ ਹੈ ਮਨ ਕੀ ਤੇ ਕਰੇ ਮਨ ਕੀ ਬਾਸਨਾ ਮੰਨ ਤੇ ਜਦੇ ਇਸ ਕਰਕੇ ਜਿਹੜੀ ਬਾਸਨਾ ਹੁੰਦੀ ਹੈ ਮੰਦਰ ਤੋਂ ਇਸ ਤਰੀਕੇ ਨਾਲ ਮੰਨਦੇ ਚੋੜੜੀ ਆ ਮਾਇਆ ਦੀ ਬਾਸਨਾ ਆਪੇ ਹਰ ਜਾਂਦੀ ਬਾਜਨਾ ਜਿਹੜੀ ਆ ਉਹ ਮਾਇਆ ਦੀ ਸਾੜ ਜੀ ਮਾਇਆ ਦੀ ਲੋੜ ਹੋ ਰਿਹਾ ਉਹ ਫਿਰ ਉਹ ਵਾਸਨਾ ਮਾਇਆ ਦੀ ਉਹ ਖੁਕ ਵਾਸਨਾ ਨਹੀਂ ਜਿਹੜੀ ਭੁੱਖ ਵਾਸਨਾ ਹੈ ਲੋੜ ਪੰਚ ਦੋਖ ਤੇ ਰਹਤ ਇਸ ਨਿੱਕੇ ਨਾਲ ਜਦ ਬੁੱਧੀ ਹੈ ਤਾਂ ਮਾਨੋ ਇੰਦਰੀ ਜਿਤ ਇਦਰੀ ਜਿਤ ਕੇ ਪੰਚ ਦੋਖ ਤੇ ਰਹਤ ਜਦ ਬੁੱਧੀ ਜਿਤ ਜਾਂਦੀ ਹੈ ਛੇ ਜਿਹੜਾ ਮਾਨ ਹੈ ਪੰਜ ਫਿਰ ਉਹ ਦੋ ਹੁੰਦੇ ਰਾਤ ਜਿੰਨਾ ਜਰ ਮੰਨ ਜੇ ਤਦਾ ਉਹਨਾਂ ਜਰ ਉਹ ਬੁੱਧੀ ਹਾਰਦੀ ਹੈ ਉਹ ਇੰਦਰ ਬਣਿਆ ਬੈਠਾ ਜੀ ਕੋਲ ਹਾਂ ਉਹਦੇ ਦੋਖ ਜਿਹੜੇ ਨੇ ਉਹ ਉਹਦੇ ਚ ਕੋਈ ਨਾ ਕੋਈ ਰੋਗ ਬਰਕਰਾਰ ਰਹਿੰਦੇ ਨੇ ਜਦੋਂ ਇੰਦਰੀ ਜਦ ਬੁੱਧੀ ਜਿੱਤੀ ਜਾਂਦੀ ਹੈ ਫੇ ਜਿਹੜਾ ਉਹ ਜਿਹੜਾ ਪੰਜਾ ਮਾਨ ਹੈ ਫਾਹਲੇ ਰੋਗ ਸੋਸਦਾ ਲੋਹੇ ਦਾ ਕੋਈ ਦੋਖ ਨਹੀਂ ਪੰਦਰੋਸਦਾ ਦੇ ਦੋਖ ਤੇ ਰ ਹੈ ਦੋਖ ਤੇ ਰ ਕੋਈ ਦੋਖ ਨਹੀਂ ਹੋਵੇ ਜਰਾ ਰੋਗ ਨੂੰ ਰੋਗ ਦੋਖ ਹੈ ਦੋਖ ਹੈ ਰੋਗ ਦੋਖ ਹੈ ਕੋਟ ਮੱਦੇ ਨਾਨਕ ਕੋਟ ਮੱਦੇ ਕੋਈ ਐਸਾ ਐਸਾ ਕਰੋੜਾਂ ਚ ਕੋਈ ਅਪਰਸ ਹਾਂ ਉਪਰਸ ਦਾ ਬਥੇਰੇ ਫਿਰਦੇ ਨੇ ਉਹ ਪੂਰਾ ਇੱਕ ਸਭਦ ਲੋ ਅ ਉਪਰਸਾਂ ਦਾ ਇੱਕ ਕੁਲਬਾਈ ਬਣ ਗਿਆ ਕੁਲਦਾਇ ਦੀ ਸੰਪਰਦਾਇ ਬਣ ਗਿਆ ਜਿਹਦੇ ਮਲਕਾਂ ਵਿੱਚ ਕਰੋੜਾਂ ਚੋ ਕੋਈ ਨਾ ਕੋਈ ਸਪੱਸ਼ਟ ਹੈ ਉਹ ਵੀ ਸਪੱਸ਼ਟ